ਸ਼ਲੋਕ ਮਹਲਾ ਪੰਜਵਾਂ ਤੈਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲਗਿਆ ਕੁਦਰੈ ਸਭੋ ਕੋਈ ਇਤਨਾ ਭੁੱਖ ਨਾ ਕਾਰਹੀ ਨਾ ਇਹਨਾਂ ਨੂੰ ਭੁੱਖਾ ਨਾ ਕੋਈ ਉਹਨਾਂ ਦੀ ਕਾਰ ਹੈ ਕਬ ਇਹ ਲੱਗ ਕਾਰ ਅਲੱਗ ਹੈ ਕਾਰਹੀ ਲਫ਼ਜ਼ ਦੀ ਮੈਂ ਕੋਈ ਨਹੀਂ ਤਿੰਨਾ ਭੋਖਾ ਨਾਕਾਰ ਕਰ ਕੋਈ ਬੇਲੇ ਨਹੀਂ ਹਰੋਂ ਦੀ ਜੀ ਕੋਈ ਬਾਤ ਕੋਈ ਕਮਾਈ ਨਹੀਂ ਹੈ ਬੋਤਾ ਕਹਿੰਦਾ ਫਿਰ ਤਾਂ ਬੈਸੋ ਹਰ ਜਨ ਕੋਰੇ ਵਾਸਤੇ ਕੋਈ ਭੋਖਾ ਰਾੜਾ ਰਹੀ ਨਾਲ ਜੋੜਤਾ ਕਾਰ ਨਾਲ ਨਾ ਕੱਟਤਾ ਠੀਕ ਹੈ ਜੀ ਪੱਕੇ ਨੂੰ ਪੰਨਾ ਛੱਡਤਾ ਇਨਾ ਭੁੱਖ ਨਕਾਰ ਹੀ ਆ ਭੁੱਖੇ ਨਕਾਰ ਹੀ ਹੈ ਜੇ ਭੁੱਖੇ ਕਰਨਾ ਕਰਕੇ ਤਾਂ ਕਾਰਗਰਦੀਏ ਭੁੱਖ ਦੀ ਤਾਂ ਕਾਰਗਰ ਹੀ ਰਹੇਗੀ ਭਾਰੋਂ ਵੇਰੀ ਭੁੱਖ ਠੀਕ ਹੈ ਜੀ ਤਿੰਨਾ ਭੁੱਖ ਨਕਾਰ ਹੀ ਜਿਸ ਪ੍ਰਭ ਹੈ ਸੋਈ ਜਿਸ ਪ੍ਰਭ ਹੋਈ ਹੈ ਉਹ ਜਿਹਦੇ ਪ੍ਰਭ ਸਭ ਕੁਝ ਆ ਘਰ ਉਹਦਾ ਸਭ ਕੁਝ ਆ ਉਹਨੇ ਕਾਰ ਕੀ ਕਰਦੀ ਜਾਂਦਾ ਘਰੋ ਹੀ ਲਾਲਾ ਬੋਲਿਆ ਲਾਲਾ ਬੋਲਿਆ ਇਹਨੂੰ ਸਭ ਵੇਖਣ ਕਰਨ ਦੇ ਪੈਸੇ ਮਿਲਦੇ ਨੇ ਹੁਣ ਇਹਨੂੰ ਦਾ ਕਰਨ ਦਾ ਹੀ ਮਿਲਦੀ ਆ ਤੇ ਬੋਲ ਨਾ ਤੂੰ ਠੀਕ ਹੈ ਜੀ ਨਾਨਕ ਚਰਣੀ ਲੱਗਿਆ ਉਧਰ ਹੈ ਸਭੋ ਕੋਈ ਇਹ ਚਲਵੀ ਲੱਗ ਜੀ ਇਹ ਸਾਰਿਆਂ ਦਾ ਹੀ ਉਦਾਹਰਨ ਹੋ ਜਾਂਦਾ ਹੈ ਕਿ ਜਿਹਨੂੰ ਵੀ ਭੁੱਖ ਨਹੀਂ ਰਹਿੰਦੀ ਕਾਲ ਨਹੀਂ ਰਹਿੰਦੀ ਜਿਹੜੇ ਚਲਦੇ ਲੱਗੇ ਗੁਰੂ ਆਪਣੇ ਸਤ ਦੇ ਉਹਨਾਂ ਦੀ ਭੁੱਖ ਔਰ ਖਤਮ ਉਹ ਕਾਲ ਵੀ ਹੁੰਦੀ ਅਸਲ ਚ ਜਿਹੜੀ ਨਾ ਸਤਿਗਤ ਵਿੱਚ ਜਾ ਕੇ ਗੁਰੂ ਘਰ ਚ ਉਹ ਕਾਲ ਨਹੀਂ ਕਹਿੰਦੇ ਤੇ ਉਹ ਸੇਵਾ ਕਹਿੰਦੇ ਤੇ ਲੰਗਰ ਛਕਦੇ ਤੇ ਸੇਵਾ ਕਰਦੇ ਤੇ ਕਾਰ ਹੁੰਦੀ ਹੈ ਜੇ ਕਾਰ ਕੱਢਦੇ ਤਰ੍ਹਾਂ ਹੋਦੀ ਤਾਂ ਸੇਵਾ ਹੁੰਦੀ ਹੈ। ਸਰੀਰ ਇੱਕ ਵੀ ਸੇਵਾ ਹੀ ਹੁੰਦੀ ਜਾਚਕ ਮੰਗੇ ਨਿਤ ਨਾਮ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੈ ਭੁੱਖ ਨਾ ਮੂਲ। ਜਾਜ ਕਾ ਬੁੱਧ ਐਂਦੇ ਤਨਾਮ ਜਾਜ ਕਾ ਨਿੱਤ ਦੋਵੇ ਦੁੱਧ ਹੈ ਜੇ ਸਾਹਿਬ ਨੂੰ ਜੂਰ ਹੋਵੇ ਮੈਂ ਤਾਂ ਨਿੱਤ ਨਾ ਦੇ ਦੁੱਧ ਨਾਨਕ ਪਰਮੇਸ਼ਰ ਜੱਜਮਾਨ ਪਰਮੇਸ਼ਰ ਵਾਲਾ ਦਾਤਾ ਹੈ ਕਿਸੇ ਭੁੱਖੇ ਨੂੰ ਬੂਲ ਉਹਨੂੰ ਮੂੜ ਭੁਖਾ ਹੀ ਨਹੀਂ ਉਹ ਵੰਗ ਦਾ ਜੀ ਹੋਰ ਲੋਭ ਦਿੱਤਾ ਉਹਨੂੰ ਭੁੱਖ ਨਹੀਂ ਕਹੇ ਚੀਤੀ ਵੀ ਲੋਭ ਤਾਂ ਤਾਉ ਮੈਨੂੰ ਭਾਵੇ ਕੁਛ ਹੁਣ ਭੁੱਖ ਹੈ ਜੀ ਅਰੇ ਮੰਨ ਰੱਤਾ ਗੋਬਿੰਦ ਸੰਗੀ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿਉ ਇਹ ਹਸਤੀ ਘੋੜੀ ਜਦ ਸੱਜਦਾ ਭੋਜਨ ਨੇ ਜੋੜਦਾ ਸੱਜਦਾ ਭੋਜਨ ਨੇ ਲੋੜਦਾ ਅਸਲ ਤੇ ਜੋੜੇ ਲਫਦੀ ਲੋੜੇ ਹੀ ਲਫਦ ਜੋੜ ਕੇ ਨਹੀਂ ਰੱਖਣਾ ਉਸ ਜੋੜਨ ਦੀ ਲੋੜ ਨਹੀਂ ਜੋੜੇ ਦਾ ਮਤਲਬ ਐਸਾ ਕਿ ਭੋਜਨ ਲੋੜ ਹੈ ਮੱਝ ਭੋਜਨ ਦੀ ਲੋੜ ਹੋਰ ਕੁਝ ਦੀ ਲੋੜ ਪ੍ਰੀਤ ਲੱਗੀ ਹਰਨਾਮ ਸਿਓ ਇਹ ਹਸਤੀ ਕੋੜੀ ਪ੍ਰੀਤ ਲੱਗੀ ਹਰਨਾਮ ਸਿਓ ਜਿਹੜੀ ਹਰਨਾਮ ਸਿਓ ਲੱਗੀ ਹੈ ਇਹਦੇ ਹੱਥੀ ਕੋੜੇ ਨੇ ਹੱਥੀ ਕੋੜੇ ਸਾਰੇ ਇਹਦੇ ਹੀ ਨੇ ਠੀਕ ਹੈ ਜਿਹੜੇ ਉਹਦੇ ਦਰ ਦਾ ਸਭ ਕੁਝ ਹੈ ਉਹਦਾ ਸਭ ਕੁਝ ਹਾਥੀ ਘੋੜੇ ਜਿਦਈ ਨਹੀਂ ਹੁੰਦੀ ਦੇ ਨੇ ਨੌਕਰਾਂ ਨਹੀਂ ਹੁੰਦੇ ਨੇ ਹਾਥੀ ਘੋੜੇ ਨੌਕਰਾਂ ਨਹੀਂ ਘੋੜੇ ਨਾ ਰੌਣੇ ਦੇ ਨੌਕਰਾਂ ਸਵਾਰੀ ਕਰਦੀਆਂ ਨੌਕਰਾਂ ਨਹੀਂ ਉਹਨਾਂ ਨੇ ਪਠੇ ਘੋੜੇ ਦੇ ਨੌਕਰਾਂ ਨਹੀਂ ਉਹਨਾਂ ਨੇ ਹੋਰ ਆਗੇ ਦਾ ਤਾਂ ਨਾ ਇਹ ਰਾਜ ਮਿਲਖ ਖੁਸ਼ੀਆਂ ਘਣੀ ਮੁਖ ਨਾ ਮੋੜੇ ਢਾਡੀ ਦਰਪ੍ਰਭ ਮੰਗਣਾ ਦਰ ਕਦੇ ਨਾ ਛੋੜੀ ਇਹ ਰਾਜ ਬਿਲਕੁਲ ਬਿਲਕੁਲ ਦੀ ਜਮੀਨ ਦਾ ਟੁਕੜਾ ਜਿਹੜਾ ਦੁਨੀਆਂ ਹੁੰਦਾ ਨਾ ਇਹਨਾਂ ਨੂੰ ਉਹਦੇ ਵਿੱਚ ਜਗੀਰ ਤੇ ਬਿਲਖ ਕਹਿੰਦੇ ਨੇ ਰਾਜ ਬਿਲਕੁਲ ਖੁਸ਼ੀਆ ਘੜੀ ਤਾਂ ਰਾਜ ਵੀ ਬਿਲਦਾ ਜਾਇਦਾਦ ਬਿਲਕੁਲ ਖੁਸ਼ੀ ਹੋਵੇ ਬਿਲਦੀਏ ਨੇ ਘੜੀ ਖੁਸ਼ੀਆਂ ਘੜੀ ਕਾਇ ਮੱਖ ਨੂੰ ਢੋੜੇ ਜਿਹੜਾ ਉਹ ਉਹ ਤੋਂ ਨਾ ਹੋੜੇ ਉਹਦੇ ਵੱਲ ਉਹਦੇ ਧਿਆਨ ਚ ਰਹੇ ਉਹ ਰਾਜ ਸਾਰਾ ਘਾਰੇ ਆ ਖੁਸ਼ੀਆਂ ਉਹਦੀਆਂ ਹੀ ਨੇ ਸਾਰੀਆਂ ਖੁਸ਼ੀਆਂ ਚ ਰਹਿ। ਉਹ ਜੀਆਂ ਘੜੀਆਂ ਰਹਿੰਦੀਆਂ ਨੇ ਰਾਜ ਸਾਰਾ ਕੁਝ ਉਹਦਾ ਹੀ ਹੈ ਜੇ ਤੂੰ ਮੇਰਾ ਹੋ ਰਹੇ। ਸਾਰਾ ਸਭ जग ਤੇਰਾ ਹੋ। ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏ ਨਿਤ ਪ੍ਰਭ ਕੋ ਲੋੜੇ। ਢਾਡੀ ਦਰ ਪ੍ਰਭ ਉਗਣਾ ਢਾਡੀ ਦਾ ਕੰਮ ਕੀ ਹੈ ਪ੍ਰਭ ਦੇ ਦਰ ਸਭ ਨੂੰ ਢਾਡੀ ਦਾ ਸਭ ਸਾਡੇ ਜਿਹੜੇ ਢਾਡੀ ਨੇ ਆਲਾ ਕੀ ਕੰਮ ਇਹ ਤਾਂ ਬੁਦਾਸੀ ਨੇ ਢਾਡੀ ਨੇ ਅਸੰਦਰ ਦੀਆਂ ਸੱਲ ਦੇ ਦੇਣ ਸਾਡੇ ਪ੍ਰਭ ਬੁੱਧੂ ਅਪਦੇ ਧਰਤੇ ਜਾ ਕੇ ਬੁੱਧੂ ਢਾਡੀ ਜਦੋਂ ਇਹ ਢਾਡੀ ਬਣ ਕੇ ਬੇੜਾ ਕਰਤਾ ਘਰ ਕੋ ਪ੍ਰਭ ਕੋ ਲੋੜੇ ਪ੍ਰਭ ਕੋ ਲੋੜੇ ਇਹ ਕਿਸੇ ਢਾਡੀ ਦਾ ਵਿਸ਼ਾ ਹੀ ਦੀ ਕਟਾੜੀ ਦੱਸੇ ਜਿਹੜਾ ਪ੍ਰਭ ਨੂੰ ਲੋੜਦਾ ਹੋਵੇ ਚੀਤਲ ਦੀ ਗੱਲ ਕਰਦੇ ਚੀਤ ਤਾਂ ਇੱਕ ਕਾਉਂਸਲ ਜਾਂ ਮਾਰਦਾ ਰੋਦੂਖੀ ਰੋਦੂਖੀ ਕਹਿੰਦਾ ਹੈ ਇਹਨੂੰ ਮੈਂ ਮਖਾ ਨਹੀਂ ਕਿ ਇਹ ਅੰਗੀਆਂ ਹੋਣਗੀਆਂ ਗੁਰਬਾਣੀ ਨੂੰ ਵਾਕੇ ਦੇਖੋ ਚੀਤਲ ਕੀ ਕਹਿੰਦਾ ਗੁਰਬਾਣੀ ਤੋਂ ਬਹੁਤ ਥੱਲੇ ਦੀ ਗੱਲਾਂ ਕਰਦੇ ਨੇ ਜੀਵਿਤ ਹਰਦਾ ਸਭ ਕੁਝ ਚਾਹਤੇ ਡਾਡੀ ਉਹ ਹੈ ਜਿਹੜਾ ਪ੍ਰਭ ਕੋ ਲੋੜੇ ਪ੍ਰਭ ਤੋਂ ਕੁਝ ਦੁੱਖੇ ਨਾ ਪ੍ਰਭ ਕਹਿਣਾ ਬੈਲੂ ਤਾਂ ਕੋਈ ਚਾਹੀਦਾ ਤੇਰੇ ਕੋਲੇ ਬਸ ਦਾ ਨਵਾਸ ਹੈ ਚਾਹੀਦਾ ਪ੍ਰਭ ਕੋ ਲੋੜੇ ਉਹ ઠાੜੀ ਹੈ ਤੇ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਇੱਕ ਦੋ ਵਾਰ ਫਕੀਰੀ ਜਿਹੜਾ ਸ਼ਲੋਕ ਪੌੜੀ ਉਹਦੇ ਵਿੱਚ ਇਹੀ ਅਰਦਾਸ ਹੁੰਦੀ ਹੈ ਕਿ ઠાੜੀ ਦਰ ਪ੍ਰਭ ਮੰਗਣਾ ਦਰ ਕਦੇ ਕਦੇ ਨਾ ਛੋੜੇ ਨਾਨਕ ਮਨ ਤਨ ਚਾਓ ਇਹ ਨਿਤ ਪ੍ਰਭ ਕੋ ਲੋੜੇ ਕਿ ਜਿਹੜਾ ਤਾਂ ਕਿ ਇਹ ਕਵਾ ਪ੍ਰਭੂ ਦੇ ਦਰਸ਼ਨ ਲੋੜਦਾ ਠੀਕ ਹੈ ਜੀ ਉਹ ਦਰਸ਼ਨ ਦੇ ਜੀਵਾਂ ਗੁਰ ਤੇਰਾ ਸਦਾ ਜੀਵਾਂ ਦਰਸ਼ਨ ਨਾਲ ਹੈ